ਇਕ ਓੰਕਾਰ ਸਤਨਾਮ ਜੋ ਜਿੱਦੋਈ ਕੋ ਓੰਕਾਰ ਜੋ ਪਰਮੇਸ਼ਵਰ ਹੈ ਬੋਲੋ ਕਿ ਸ਼ਾਮ ਨੂੰ ਆਪੇ ਰੰਗ ਵੀ ਇਹ ਦੇ ਵਿੱਚ ਉਕੇ ਦੇ ਕਰੋ ਕਹਿੰਦੇ ਸਤ ਸਤ ਹੈ ਵਾਪੀ ਨਾਮ ਰੂਪ ਸਭ ਹੋਂ ਐਸੋ ਜੋ ਬਵੇਕ ਹੈ ਐਸੋ ਜੋ ਵਿਚਾਰ ਹੈ ਸੋ ਬੇਕ ਪੈ ਸਭ ਸਾਧੂ ਨੂੰ ਕੋ ਮੂਲ ਜੋ ਹੈ ਵਿਵੇਕ ਤੋਂ ਸਭ ਸਾਧੂ ਨੂੰ ਹੈ ਵਿਵੇਕ ਤੋਂ ਹੈ ਜੈ ਮਵੇਕ ਮੂਲ ਘਾਹ ਤੋਂ ਜਿੱਥੇ ਵਿਵੇਕ ਆ ਗਿਆ ਹੋਵੇ ਉਹ ਫਿਰ ਵਰਾਗ ਵੀ ਆ ਗਿਆ ਫਰ ਸੰਤੀ ਵੀ ਆ ਗਈ ਲੋਕ ਇੱਛਾ ਵੀ ਆ ਗਈ ਕਿੰਝ ਸੰਤੇ ਦੀ ਗੱਲ ਨਹੀਂ ਜਿਹੜੇ ਗੁਰਾਂ ਦੀ ਕਿਰਪਾ ਦੁਆਰਾ ਫਤਨਾਮ ਦਾ ਜਾਪ ਕਰਨ ਵਾਲੇ ਪੁਰਖ ਹੋਏ ਉਹਦੀ ਉੰਗਰੀ ਕੋ ਵੇਖ ਹੈ ਉਹਦੀ ਉੰਗਰੀ ਵਰਾਗ ਹੈ ਉਹਦੀ ਉੰਗਰੀ ਖਰਤਮਤੀ ਸੰਦਮ ਸਰਵਾਤੀ ਸੀ ਸਮਾਦਾਨ ਪਹਿਚਾਨ ਜਿਸੇ ਤਰਕਾਰ ਛੇ ਚੀਜ਼ਾਂ ਦੀ ਬੁਨਤੀ ਰੱਖਣੀ ਹੈ ਕੰਮ ਆਂਦੀਆਂ ਵਾਸ਼ਨਾ ਨੂੰ ਇੰਦਰੀਆਂ ਦਾ ਦਮਨ ਕਰਨੋਂ ਕਿਸਿਆਂ ਦਾ ਸਰਵ ਜੀ ਜੀਸਾਲ ਤੇ ਇਸ ਤਰ੍ਹਾਂ ਜੋਪੁਰ ਪਿਆਸੋਂ ਮਨ ਕੇ ਕਾਮ ਪੂਰਾ ਨਹੀਂ ਹੋਣਾ। ਆਪੋ ਆਪਣਾ ਇਸ ਤਰ੍ਹਾਂ ਦਾਣਾ, ਸਵਾਭਾਵ ਆਣਾ। सावਧਾਨ ਹੋਣਾ ਇਸੇ ਪ੍ਰਕਾਰ। ਕਿ ਪੁੱਛਾ ਪਾਣੀ ਆਪਿਆਂ ਮੈਂ ਦੁੱਖ ਕੋਈ ਕਰ ਸੁਖੋ। ਖੋਬ ਹਲਕੀ ਜਾਣੇ। ਐਸਾ ਸਿੱਖੂ ਸੋ ਆਉਣਾ। ਪਿਆਰੇ ਸੁਖੀ ਗੁਰੂ ਦੇ ਪਾਈ। ਜਿਗਰਾ ਜੀਉਂ ਜੇਖੂ ਨੇ ਪੁਲੀਆ ਸੁਪੀ ਤੁਝੇ ਤੇ ਆਈ ਜੇ ਭੁੱਖ ਦੇ ਕੈਦੀ ਰਾਜਾ ਬੁੱਖੇ ਸੁਖ ਸੁਮਾਈ ਇਸ ਪ੍ਰਕਾਰ ਨੇ ਗੁਰੂ ਸਿਖਿਆ ਹੈ ਇਹ ਪ੍ਰਾਪਤੀ ਹੋਵੇ ਸਾਰਿਆਂ ਪਦਾਰਥਾਂ ਤੋਂ ਕਿਤੋਂ ਬ੍ਰਾਹਮ ਹੋ ਜਾਣਾ ਵਿਰਾਗ ਬ੍ਰਹਮ ਲੋਕ ਤੱਕ ਜਿੰਨੇ ਪਹੁੰਚਦਾ ਸਾਰੰ ਮਿੱਤਿਆ ਦੀ ਜਾਨਣਾ ਇਸ ਪ੍ਰਕਾਰ ਦੇ ਜਉ ਸਾਧਨਾ ਦੇ ਸਾਧ ਜਿਹੜਾ ਹੈ ਉਹ ਅਧਿਕਾਰੀ ਹੈ ਇਸ ਅਮਰਪੁਰ ਬਾਣੀ ਦੇ ਕਦਮ ਦੇ ਮਾਇਕ ਹੈ ਉਹ ਸਤਨਾਮ ਦਾ ਜਿਹੜਾ ਜਪਕ ਹੈ ਉਹ ਗੁਰਮਤਾ ਵਿਖਾਰੀ ਹੈ ਅਤੇ ਫੇਰ ਮਾਰਾ ਵਿਸ਼ੇਸ਼ ਬਾਣੀ ਦੇ ਵਿੱਚ ਕਿਹਾ ਹੋਇਆ ਹੈ ਸਾਹਮਣੇ ਕਹਿੰਦੇ ਹੈ ਕਰਤਾ ਜਿਹੜਾ ਹੁੰਨੇ ਦੇ ਕਰਨ ਵਾਲਾ ਦੇ ਕਰਨ ਵਾਲਾ ਕਰਤਾ ਕਹੇ ਜੀਵ ਕੋ ਜਿਹੜੇ ਕੰਮਾਂ ਨੂੰ ਕਰਨ ਵਾਲਾ ਆਪਣੇ ਆਪ ਨੂੰ ਮੰਨਦੇ ਜੇ ਮੈਂ ਕਰਦਾ ਹੈ ਜੀਵ ਹੈ। ਅਪੋ ਇਹ ਗੈਸੇ ਤੋਂ ਪੁਰਖ ਜਿਹੜਾ ਹੈ, ਪੁਰਖ ਨਾਮ ਦੀ ਸ਼ਕਤੀ ਹੈ ਜੋ ਮਾਇਆ ਸਮਲੋਕ ਸਾਰੀ ਸਿੱਖੀ ਨੂੰ ਸੁਤਪੰਨੀ ਕਰਦਾ, ਕਲਨਾ ਕਰਦਾ, ਲੈਕਾ ਕਰਦਾ ਜੋੜ ਕਰਕੇ ਇਹ ਦੱਸ ਕਿ ਇਹ ਵਿੱਚ ਕਰਦਾ ਜੀਵ ਤੇ ਪੁਰਖ ਈਸ਼ਵਰ ਉਹਨਾਂ ਵੀ ਇੱਕ ਬੈ ਸਿਧੁਰਾਂ ਦਾ ਉਹ ਸੁਭਾਂਤ ਹੈ। ਇਹ ਵਿਸ਼ਾ ਇਸ ਬਾਣੀ ਦੇ ਅਸਰੇ ਕਿ ਜੀਵ ਤੇ ਈਸ਼ਵਰੀ ਇਕਤਾ ਹੈ। ਜੇ ਜੀ ਕੋਈ ਹੋਈ ਕਿ ਸੋ ਪਰ ਦੂਰ ਨਹੀਂ ਕਬ ਤੂ ਹੈ ਇਸ ਪ੍ਰਕਾਰ ਦੇ ਜਿਹੜੇ ਬਾਤਾਂਗੇ ਸੂ ਸਦਾ ਗ੍ਰਾਮ ਤੋਂ ਗ੍ਰੰਥ ਇਸ ਸਿਧਾਂਤ ਤੋਂ ਹੋਇਆ ਹੈ ਔਰਖੋ ਨਿਰਵੈਰ ਇਸ ਦੇ ਵਿੱਚ ਮਰਯੋਗ ਜੀ ਨੇ ਕੀ ਕੀ ਕੀਏ ਕਹਿੰਦੇ ਇਹ ਵੈਰ ਹੈ ਕਿ ਜੋ ਮਰਨ ਦਾ ਭੌਗ ਹੈ ਲੈਣੇ ਇੱਕ ਜਾਮਾ ਹੈ ਵੈਰ ਜੋ ਆਤਮਾ ਵਰਨਾ ਆਪ ਕਹਤਾਂ ਕਹਿੰਦੇ ਜਿਹੜਾ ਜੰਮਣ ਮਰਨ ਦਾ ਭੌਗ ਹੈ ਇਹ ਜਿੱਥੇ ਨਿਵਰਤ ਹੋ ਨਾ ਕੋਈ ਜਨਮੇ ਨਾ ਕੋਈ ਮਰੇ ਆਪ ਕਰੇ ਤੇ ਵੈਰ ਤੋਂ ਵੈਰ ਜਿਹੜਾ ਆਪਨਾ ਹੈ ਉਹ ਵੀ ਜਿੱਥੇ ਪ੍ਰਾਪਤੀ ਹੋ ਜਾਵੇ ਦੇਵ ਸਰਪਾਲ ਦੀ ਖੁਨੀ ਰਸੀ ਤੇ ਪਰਮਾਨੰਦ ਦੀ ਪ੍ਰਾਪਤੀ ਇਹ ਪਰਮ ਪ੍ਰਯੋਜਨ ਦੀ ਸਿੱਧੀ ਹੈ ਇਸ ਤਰ੍ਹਾਂ ਨੇ ਭੌਤਿਕ ਮਿਲਵੈਰ ਵਿੱਚ ਇਹ ਪਰਯੋਜਨ ਸਮੰਧ ਦਿਖਾਇਆ ਹੈ ਹਨ ਇੱਥੇ ਉਹ ਬ੍ਰਹਮੋ ਦੇ ਬਾਣੀ ਲਾਭੂ ਦੀ ਕੀ ਸੰਬੰਧ ਹੈ ਕਿੰਨੇ ਸਾਧ ਵਹਿਜੋ ਊਰਤ ਦੀ रूपर की बाद महान अजून कह वेद को थै, थै जो सात्र प्रकाशे ज्ञान बहु प्रकाशे ज्ञान जो यमारू ब्रह्म है दूना तो है कोष ਮੰਨਿਆ ਹੋਇਆ ਹੈ ਉਹ ਜਿਹੜਾ ਸਾਏ ज्ञान ਦੇ ਪ੍ਰਕਾਸ਼ ਨੂੰ ਆਆ वेद वो प्रतिपादिक ब्रह्मदा ते ब्रह्मा काल मूल से ਆਲਵੇ ਜੋ ਮੂਰਤੀ ਸੋਪਰ ਕੀ ਬਾਤ ਮਹਾਨ ਜੋ ਕਾਲ ਤੋਂ ਬਹਿ ਰੂਪੋ ਪ੍ਰਤੀਬਾਤ ਰੂਪ ਤੇ ਅਜੂਨੀ ਕਹੇ ਵੇਦ ਸੰਬੰਧ ਹੈ ਜਨਾਇਕ ਬੋਧ ਕੋ ਹੈ ਗੁਰੂ ਜਨ ਸਾਹਿਬ ਜੀ ਬੋਧ ਕਾ ਆਕਾਲਪੁਰਖ ਦੇ ਤੇ ਆਕਾਲਪੁਰਖ ਬੋਧ ਜਾਣੇ ਯੋਗ ਹੈ ਇਹੋ ਆਕਾਲ ਮੂਰਤ ਜੁਗੇ ਇਹੂਨੇ ਸੋਹੰਦੇ ਵਿੱਚ ਜੇ ਸਾਹਬ ਜੀ ਬ੍ਰਹਮ ਦਾ ਇਸਲੀ ਜੋਤ ਨਾਲ ਸੰਬੰਧ ਆਪੋ ਵਿੱਚ ਹੀ ਦਿਖਾਇਆ ਬਾਕੀ ਦਾ ਸੰਬੰਧ ਇਹ ਹੈ ਅਧਿਕਾਰੀ ਦਾ ਤੇ ਮਾਰੇ ਸਾਹਿਬ ਦੀ ਬਾਣੀ ਦਾ ਉਹ ਇਸ ਤਰ੍ਹਾਂ ਹੈ ਕਿ ਦਾਦੇ ਪੁੱਤ ਜੀ ਨੂੰ ਗਿਆਨ ਦਾ ਤੇ ਗੁਰੂ ਜੀ ਦਾ ਕੀ ਸੰਬੰਧ ਹੈ ਜਨਮ ਜਨਮ ਸੰਬੰਧ ਹੈ ਗੁਰੂ ਗਿਆਨ ਸਾਹਿਬ ਜੀ ਪਿਤਾ ਰੂਪ ਹੈ ਤੇ ਗਿਆਨ ਪੁੱਤਰ ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਪੈਦਾ ਹੁੰਦਾ ਏ ਇਸ ਕਰਕੇ ਪੁੱਤਰਵਾਸ ਤੋਂ ਸ੍ਰੀ ਗੁਰਸਾਹਿਬੀ ਪਿਤਾ ਹੁਣੇ ਇਹ ਕੇ ਸੰਬੰਧ ਗਿਆਨ ਦਾ ਤੇ ਗੁਰਦਵਾਰ ਸਾਹਿਬ ਤੋਂ ਪਿਤਾ ਦੇ ਦਾ ਸੰਬੰਧ ਹੈ ਉਹ ਅੰਦਰ ਜਿਹੜਾ ਸੰਬੰਧ ਹੈ ਇਹ ਸਰਕਾਰ ਬਾਖ ਬਾਖ ਭਾਵ ਦਾ ਸੰਬੰਧ ਹੈ ਇਹ ਸਰਕਾਰ ਸਾਹਿਬ ਸੰਗੀਤੀ ਦਾਖੀ ਦੇ ਸੰਬੰਧ ਜਿੰਨੇ ਹੈ ਇਹ ਸਾਰੇ ਇਹੋ ਜਿਹੇ ਕਰਦੇ ਆ ਮੂਲ ਸੁਖੋ ਰੂਪ ਕਰਕੇ ਸਾਰੇ ਤਸਿਲ ਦੀ ਸਿਹਨ ਗੁਰ ਪਰ ਸਾਧ ਇਹ ਇਹਨਾਂ ਨੂੰ ਬੰਦੋਂ ਗਿਆਨ ਜੋ ਦਿਨ ਗੁਰ ਕਰਨਾ ਨਾ ਹੋ ਤਾਂ ਤੇ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਕਰਕੇ ਇਹ ਗੁਰਾਂ ਦੀ ਕਿਰਪਾ ਹੀ ਸਾਰਿਆਂ ਵਿੱਚ ਇਹਨਾਂ ਅਨੰਦਾਂ ਦੇ ਕਾਰਨ ਹੈ ਸੰਗੋ ਦੀ ਕਿਰਪਾ ਨਾਲ ਹੀ ਇਹ ਸਾਰੇ ਗਿਆਨ ਹੋ ਸਕਦੇ ਆ ਇਸ ਸਰਕਾਰ ਸਾਹਿਬ ਸਿੰਘ ਜੀ ਇਹ ਮੂਰ ਮੰਤਰ ਦੇ ਅੰਦਰ ਇਹ 10 ਅਰਥ ਲਾਵਾਂ ਵਾਲੇ ਹਨ ਇਸ ਮੰਤਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੂੰ ਵਿਚਾਰ ਦਿੱਤੀ ਸਮਾ ਉਹ ਅੱਗੇ ਗ੍ਰੀਵ ਨੂੰ ਆਖੀ ਇਹ ਇਤਿਹਾਸਕੀ ਹੋ ਚੁੱਕਾ ਹੈ ਦੇ ਇਸੇ ਪ੍ਰਕਾਰ ਸਾਦਰ ਦੇ ਪਾਵਾਂ ਦੇ ਅਰਥ ਤੇ ਇਸੇ ਪ੍ਰਕਾਰ ਸ਼ੰਕਾ ਇਸੇ ਪ੍ਰਕਾਰ ਮਹਾਰਾਜ ਸਾਹਿਬ ਦੇ ਅੰਦਰ ਜਿਹੜਾ ਸਰੂਪ ਲਿਖਣ ਦੇ ਤਕਸਤੀ ਲਿਖਣ ਵਾਲੀ ਹੋ ਗਿਆ ਹੈ ਤੇ ਅਨੁਭਵਾਂ ਵਾਲੀ ਅਸਮਿਤ ਹੋ ਗਿਆ ਹੈ ਇਹ ਦੂਰਤ ਵੀ ਹੋ ਚੁੱਕਾ ਹੈ ਜੇ ਤੁਸੀਂ ਗਏ ਅੱਧੀ ਵਿਆਪਤੀ ਦੋਹੀਨ ਵਿਅਕਤੀ ਵਾਲੇ ਵੀ ਸਾਰੇ ਰਾਜ ਦੇ ਸਰਕਾਰ ਦਾਸਨਾਹ ਉਪਰਕੇ ਕਰਦੇ ਇਸ ਸਰਕਾਰ ਦੇ ਹੋਏ ਹਨ ਤੋਂ ਅੱਗੇ ਇੱਕੋ ਰੱਖਿਆ ਕਰਨ ਵਾਲਾ ਸਾਰਾ ਦਾ ਪ੍ਰਮਾਸ਼ ਕੋ ਸੱਤਿਆ ਜੀ ਹੁੰਦਾ ਨਾਮ ਪ੍ਰਸਿੱਧ ਹੈ ਅਤੇ ਕਰਤੋ ਸਾਰੇ ਜੀ ਲੱਜਣ ਵਾਲਾ ਖੁਰਖੂਰੂ ਸਾਰਿਆਂ ਨਾਮ ਵਿੱਚ ਹੈ ਦੈਰੇ ਦੌਰ ਤੋਂ ਹੈ ਕਾਲ ਮੂਰਤਾਲ ਤੋਂ ਹੈ ਸ਼ੂਤ ਹੈ ਇਹ ਕਾਜ ਜੂਨੀ ਅਜਨਮਾ ਰੂਪ ਹੈ। ਇਹ ਸੁਖੇ ਸੁਕਾ ਰੂਪ ਹੈ। ਸੰਗਤਾਂ ਦੀ ਕਿਰਪਾ ਕੇ ਆਏ। ਅੱਗੇ ਬਾਣੀ ਅਰੰਭ ਕਰਦੇ ਹਨ। ਇਹ ਸੱਚਖੰਡ ਵਿੱਚ ਵੀ ਉਚਾਰਨ ਕੀਤੀ ਹੈ। ਕਿੰਨਾ ਨਾਲ ਵੀ ਚਰਚਾ ਹੋਈ ਹੈ। ਅਤੇ ਸੰਗਤਾਂ ਦੇ ਆਧਾਰ 'ਤੇ ਹੀ ਕਰਨ ਹੋਇਆ ਹੈ। ਗੁਰੂ ਅੰਦਰ ਸਾਹਿਬ ਨੂੰ ਇਹ ਪ੍ਰਸਾਦ ਪ੍ਰਸਾਦ ਵਿੱਚ ਸੱਜੇ ਪਾਤਸ਼ਾਹ ਜੀ ਨੇ ਇਹ ਚਾਰਨ ਕਰਕੇ ਬਾਣੀ ਦਾ ਉਦੇਸ਼ ਦਿੱਤਾ ਹੈ ਕਿ ਆਪੋ ਬਾਣੀ ਦਾ ਇਹ ਬਾਣੀ ਦੇ ਰਾਮ ਬਿਕਮਾਰਾ ਸਾਹ ਨਾਮ ਰੱਖਦੇ ਆ ਬਾਣੀ ਜਪ ਬਾਣੀ ਹੈ ਭਾਈ ਕਿ ਜਗਨ ਜੋਗ ਹੈ ਇਹਨੋਂ ਕੋ ਕੋ ਨਾਮ ਜਾਪ ਜਿਨ੍ਹਾਂ ਨੂੰ ਇਹ ਜਪ ਜਾਪ ਦੀ ਦਾਤ ਪ੍ਰਾਪਤ ਹੋਈ ਇਹ ਤੁੰਕਾ ਦੇ ਨੇ ਜਪ ਨਾਮ ਹੈ ਇਹ ਬਾਣੀ ਦਾ ਜੀ ਜਪਨਾਉ ਜਪਨਾਉ ਆਗਿਆ ਹੈ ਜਪਨਾ ਕਰੋ ਅਕਾਲ ਹੈ ਨਾਲਾ ਪਵਿੱਤਰ ਹੈ ਸਾਰਿਆਂ ਦੇ ਜਿਸ ਨੂੰ ਕਰਨੋ ਆ ਰਹਾ ਐਸਾ ਜੋ ਪਰਮੇਸ਼ਰ ਦਾ ਨਾਮ ਹੈ ਜੋ ਪੈਦਾ ਕਰਨ ਵਾਲਾ ਪੂਰਨ ਗਿਆਨ ਪਰਮੇਸ਼ਰ ਦੇ ਨੂੰ ਐਸਾ ਹੀ ਨੂੰ ਜਪਤ ਕਰਨ ਵਾਲਾ ਜਪ ਜੇ ਬਾਣੀ ਜਪਦੇ ਤਾਂ ਹੀ ਹਰ ਹਮ ਜੁੜੇ ਰਹੋ ਆਪਣੇ ਮਨ ਨੂੰ ਜਾਓ ਕਿ ਜੋੜ ਕਰਕੇ ਬਾਣੀ ਕਰਕੇ ਰਸਨਾ ਕਰਕੇ ਪਰਾਂ ਬਾਣੀ ਕਰਕੇ ਆਪਣੇ ਇਸੇ ਨੂੰ ਬਾਣੀ ਕਰਕੇ ਵੇਖੀ ਨਹੀਂ ਕਿਾਰੇ ਨੂੰ ਨਹੀਂ ਮਨ ਸਿੱਖਾਂ ਜੇ ਵੀ ਸੀ ਜੋ ਛੱਡ ਗਈ ਜੀ ਜਸ ਸਾਹਿਬ ਦੇ ਜਦੋਂ ਬਾਖੂ ਅਜਨ ਸਾਹਿਬ ਦੀ ਛਣਾਂ ਆ ਕੇ ਕਰੀ ਲਾ ਕੇ ਉਸ ਵੇਲੇ ਐਦਾ ਸਿੱਧ ਹੋ ਗਿਆ ਸ਼ਕਤੀਆਂ ਦਾ مالک ਉਦੂ ਦਾ ਆਵਾਜ਼ ਕੱਟਿਆ ਰਹਿ ਗਿਆ ਸੀ ਇਹਨਾਂ ਦੇ ਬਚਨ ਕੈਨ ਤੋਂ ਦੇ ਗੁਰੂ ਸਾਹਿਬ ਦੀ ਭਾਈ ਦੇ ਬਚਨ ਜਿਹੜੇ ਸੀ ਜਦ ਕਾਲ ਕੇ ਕੀ ਉਹ ਵੀ ਕਾਗ ਜੋ ਬਚਨ ਲਿਖੇ ਗਏ ਪੂਰੇ ਹੋ ਗਏ ਸਿੱਖਾਂ ਦੀ ਇਨੋਂ ਮੇਰੇ ਵੱਲ ਬਾਦ ਕੀਤੇ ਆ ਮਹਿਮਾ ਨੇ ਇਹੇ ਪ੍ਰਕਾਰ ਭਾਈ ਗੋਗਰੀਆ ਜੀ ਵੀ ਕੀ ਜਪ ਸਾਹਿਬ ਦੇ ਪਾਸ ਹਮੇਸ਼ਾ ਕਰਿਆ ਕਰਦੇ ਉਹਨੂੰ ਵੀ ਬੜੀ ਭਾਰੀ ਮਹਿਮਾ ਆਉਂਦੀ ਦੀ ਲੋੜ ਹੈ ਇੱਕ ਤਾਂ ਜਿਸ ਪ੍ਰਖ ਨੂੰ ਜਾਪ ਕਰਨਾ ਹੈ ਉਹ ਸਰੀਰ ਦੀ ਸੁੱਧੀ ਜ਼ਰੂਰ ਕਰੇ ਪਹਿਲਾਂ ਇਸ਼ਨਾਮ ਉਹਦਾ ਕੀਤਾ ਹੋਣਾ ਜ਼ਰੂਰ ਬਾਣੀ ਕਰਨ ਤੋਂ ਪਹਿਲਾਂ ਅਬ ਜਪ ਕਰੇ ਫੇਰ ਅਕਾਂਥ ਬੈਠਾ ਹੋਇਆ ਹੋਵੇ ਅਕਾਂਥ ਘਰ ਦੀ ਨਹੀਂ ਬਣ ਸਾਰਾ ਪਰਿਵਾਰ ਨੀਤ ਜਿੱਤਦਾ ਆਪ ਜਾ ਕੇ ਉਹੋ ਅਕਾਂਥ ਹੋ ਕੇ ਬੈਠ ਸਕਦਾ ਇਸਮਾਮ ਕਰਕੇ ਅਬੇ ਸਰੀਰ ਵੀ ਸੁੱਖੀ ਹੋਵੇ ਦੀ ਗੱਲ ਗੁਰੂ ਸਾਹਿਬ ਦੇ ਵਿੱਚ ਪੂਰਾ ਮਿਸ਼ਟਾ ਹੋਵੇ ਉਹ ਜਾਣਗੇ ਮੈਂ ਵਾਹ ਦੇ ਚਰਨਾਂ ਵਿੱਚ ਬੈਠਾ ਜੇ ਤਾਂ ਪੂਰਾ ਹੋਏ ਦਿਲ ਦੇ ਵਿੱਚ ਜੇ ਪੂਰਾ ਮਿਸ਼ਟਾ ਹੋਵੇ ਅਬੇ ਫਿਰ ਤੇ ਉਹ ਸਰੂਪ ਕੀ ਪ੍ਰਥਵੀ ਤੇ ਜੁੜਿਆ ਹੋਇਆ ਤੇ ਸ਼ਮਨ ਤੇ ਮਨ ਆ ਵੀ ਆ ਗਿਆ ਲੋਕਾਂ ਨਾਲ ਗੱਲਾਂ ਕਰਨ ਲੱਗੀਆਂ ਮੈਨੂੰ ਇੰਨਾ ਆਨੰਦ ਆਇਆ ਬਹੁਤ ਸਾਰੀ ਦੇਰ ਤੱਕ ਜਾਬ ਕਰਨਾ ਵਿੱਚ ਪੂਰਾ ਮਿਲਾਵਾਂ ਇਹ ਹਰ ਵਕਤ ਗੁਰਮੀ ਦੀ ਸਾਂਗੀ ਹੈ ਨਾਮ ਦੇ ਤੇ ਸੰਤੋਖ ਹੋਵੇ ਲਾਲ ਜੀ ਨਾਲ ਮੈਨੂੰ ਜੀ ਆ ਜਗਜੀਤ ਸਿੰਘ ਸਾਹਿਬ ਨੇ ਇਹ ਕਬੂਲ ਕਰਦੇ ਕਿ ਤਕਵਾਣਾ ਨੇ ਕਹਿੰਦਾ ਕਿ ਮੇਰੀ ਮੈਂ ਵੀ ਬਿਮਾਰ ਨਾ ਹੋਵੇ ਮੇਰਾ ਮਕਾਨ ਮੰਗਿਆ ਜਾਵੇ ਮੇਰੀ ਨੌਕਰੀ ਵੀ ਲੱਗ ਜੇ ਐਈਆਂ ਕਾਮਰਾਜ ਨਾਲ ਫਰਿਆ ਹੋਣਾ ਜੀ ਇਹਨਾਂ ਚੀਜ਼ਾਂ ਦੇ ਸਹੇਦ ਹੋ ਕੇ ਜਿਹੜਾ ਬਾਤ ਕਰੇਗਾ ਉਹ ਸਾਰੇ ਦੁੱਖ ਨੂੰ ਮਿੜਵਾਣਗੇ ਇਹੋ ਜਿਹਾ ਦਾ ਬਾਤ ਹੈ ਸਾਹਿਬ ਕਾਲੇ ਨੂੰ ਜੋ ਕਿਤੇ ਵੀ ਗੁਰੂ ਸਾਹਿਬ ਅੱਧੀ ਛੇ ਪਾਸ਼ਾ ਦੇਣ ਲੱਗੇ ਸੀ ਇਹਨੂੰ ਕਾਮਣਾ ਕਰਨ ਦੀ ਕੋਲੇ ਦੀ ਪਰ ਫਿਰ ਵੀ ਜੰਮਣ ਮਨ ਮੇ ਇੱਕ ਗੇਂਦ ਪ੍ਰਕਾਰੇ ਜਗਸਾਹਬ ਦੀ ਮਹਿਮਾ ਜਿਹੜੀ ਵਿਰਾਈ ਕਾਈ ਸੁਪੋਖ ਤੋਂ ਲਿਖਿਆ ਸਿੱਖ ਬਣ ਗਿਆ ਗੁਰੂ ਕਾ ਜਗਜੀਤ ਸਾਹਿਬ ਕੰਠੀ ਕੀਤਾ ਚੌਲਾਂ ਤੋਂ ਬਗਾਇ ਖੂਸ ਕਿੰ ਕੰਮ ਆਉਣਾ ਇਹ ਸਿੱਖ ਦੀ ਬਣਾਉਣਾ ਜ਼ਰੂਰ ਹੈ ਪਰ ਅੰਦਰ ਵਗੇ ਇਨਸਾਫ ਸੰਗਤੀ ਕਾ ਨੂੰ ਨਹੀਂ ਹੈ ਅਰਾਜ ਨਹੀਂ ਹੈ ਜੇ ਵੀ ਕਲਿਆਣ ਕਰਨ ਵਾਲੀ ਚੀਜ਼ ਆ ਉਹਦੇ ਅੰਦਰ ਲਖੀਨੀਗੀ ਜਿੰਦ ਕਰਕੇ ਦਾਣੀ ਦੇ ਜਾਤ ਨੂੰ ਜ਼ਰੂਰ ਬਣਨਾ ਜੋ ਹੈ ਇਸ ਲਈ ਜਪosaur ਦਾਇਤ ਨੂੰ ਕਰਾਂਧੁਲਦਾ ਮਹਾਰਾਜ ਪ੍ਰਮੇਸ਼ੁਰ ਉਹਨਾਂ ਦਾ ਪਰਸ਼ੰਸ ਵੀ ਜੇ ਮਾਰੂ ਨ ਕਈਏ ਵੀ ਤਿੰਨ ਕਾਲਾਂ ਚ ਕਹਿੰਗੇ ਬਾਪਾ ਕਹਾਂਗੇ ਚਾਰ ਕਾਲ ਹੋਵੇ ਤੇ ਜੇ ਚਾਰ ਕਾਲ ਕਹਿੰਗੇ ਆਪਾਂ ਕਹਾਂਗੇ ਤਿੰਨ ਕਾਲ ਹੈ ਇਹੋ ਸਵਾਲ ਤੋਂ ਲੈ ਕੇ ਗੁਰੂ ਸਾਹਿਬ ਨੂੰ ਜੀਵਨ ਜੀ ਇੱਕ ਵਰਸ਼ੂ ਕੀ ਕਾਜ ਤੋਂ ਵੀ ਪਰਮੇਸ਼ਵਰ ਦਾ ਕਾਲਾ ਕਿ ਮਾਰੋ ਸੱਚਾ ਆਦ ਸੱਚ ਮਾਰੋ ਸਾਬ ਕੋਈ ਹਿਸਤੋ ਸਾਰੇ ਜਗ ਜੀ ਹੋ ਸੀ ਬਣਾਈ ਕੋਦੋਂ ਸੀ ਪਰਮੇਸ਼ਵਰ ਸੱਚ ਜਦੋਂ ਜੁਗਾਂ ਨੂੰ ਮਲਜਾਵਾਂ ਵੀ ਉਹ ਸਤ ਸ੍ਰੂਪ ਕਰਦੇ ਨੇ ਸ਼ਤਿ ਨੂੰ ਤੇ ਹੈ ਵਰਤਮਾਨ ਕੱਲ ਦੀ ਸਮਾਂ ਹੈ ਦੇਵੇ ਦੂਰ ਹੱਥ ਕਰੂ ਪਰਮੇਸ਼ਰ ਹਾਂ ਮਾਨਕ ਹੋਤੀ ਹੀ ਸੱਚ ਉਹ ਜਿਹਨੂੰ ਇਹ ਜਦ ਆ ਗਿਆ ਉਸ ਵੇਲੇ ਵੀ ਸਰਗਰ ਮਾਨਕ ਦੇਵ ਜੀ ਕਹਿੰਦੇ ਹਮਸੇ ਹੀ ਸੱਚ ਉਹ ਸਿੱਧੋ ਸੱਚ ਨਾਸ ਨਹੀਂ ਹੁੰਦਾ ਸਿੱਧ ਕਹਿੰਦੇ ਕਿ ਤਿੰਨ ਕਾਲ ਕਹੇ ਹੈ ਤੁਸੀਂ ਚਾਰ ਕਾਲ ਬਣਾਉਦੇ ਹਜ਼ੂਰ ਕਹਿੰਦੇ ਕਿ ਉਹ ਜਿਹਨੇ ਗੁੱਡਾਂ ਨੂੰ ਆ ਕੇ ਵਿੱਚ ਸੱਚ ਨਹੀਂ ਕਰੋ ਆਪ ਵੀ ਸੈਤਜਰੂਪ ਹੈ ਹੈ ਵੀ ਵਿਸ਼ਿਸ਼ਟ ਰੂਪ ਹੈ ਨਾਮ ਕੋ ਹੋਤੀ ਕੀ ਦੇ ਕੋਈ ਵੀ ਸੈਤਜਰੂਪ ਨਹੀਂ ਦਾ ਜਿੰਦੇ ਮਹਾਰਾ ਸੰਗੀ ਕਾਲ ਨਹੀਂ ਕਿ ਦੱਸਿਆ ਪ੍ਰਕਾਰ ਤੁਹਾਡੇ ਪਰਸ਼ਨਾਂ ਦਾ ਯੋਗ ਉੱਤਰ ਦੇ ਕਰਕੇ ਤੁਮੇ ਚੰਗੀ ਤਰੰਤ ਪ੍ਰਸਤ ਕੀਤਾ ਹੈ ਇਸ ਫੰਕਸ਼ਨ ਦੇ ਉਸ ਵਕਤ ਮਾਰੇ ਸਾਡੇ ਬਾਪੂ ਗੁਰੂ ਸਾਹਿਬ ਨੂੰ ਪਰਖੂ ਕੀ ਕਰਦੇ ਸੱਚੇ ਬਾਪ ਜੀ ਨੂੰ ਆਖੀ ਉਹ ਜੋ ਪਰਮੇਸ਼ਰ ਹੈ ਉਹ ਕਿਸ ਪ੍ਰਕਾਰ ਹੈ ਮਾਰੇ ਕਹਿੰਦੇ ਇਹ ੁਰਖ ਜਦੋਂ ਜਗ ਕੀ ਲੱਗਣਾ ਨਹੀਂ ਸੀ ਜੱਦੀ ਜਦੋਂ ਪੰਜੇ ਕੱਪ ਨਹੀਂ ਲੱਗੇਗਾ ਆਕਾਸ਼ ਨਾ ਵਰਦੀ ਨਾ ਪਾਉਣ ਨਾ ਪਾਣੀ ਕੋਈ ਨਹੀਂ ਸੀ ਉਦੋਂ ਜਗ ਤੇ ਵਿੱਚ ਹੀ ਉਹ ਸੱਚ ਸ੍ਰੀ ਗੁਰੂ ਸ਼ਰੋ ਜੋ ਗਾਦੇ ਸੱਚ ਜਦੋਂ ਤੁਮ ਸੋਚੇ ਸੱਚ ਨੂੰ ਤੇ ਦਾ ਦੇ ਆਤਮਿਕ ਸੱਚ ਸੱਚ ਵੀ ਉਹ ਉਹ ਨਾਲਕ ਹੋਸੀ ਕੀ ਨੂੰ ਵੀ ਜਦੋਂ ਜਗਤ ਹੀ ਬੰਨੋ ਹੋ ਜਾਏਗੀ ਉਹ ਵੀ ਉਹ ਸੱਚ ਰੂਪ ਇਹ ਨਿਸ਼ਚੇ ਕਰੋ ਤੇ ਮਾਰਾ ਉਹ ਜੋ ਰੂਪ ਦੀ ਪ੍ਰਾਪਤੀ ਮੈਨੂੰ ਕਿਸ ਤਰਕਾਰ ਹੋਵੇ ਤਾਂ ਹਜੂਰ ਕਹਿੰਦੇ ਹੁਣ ਆਦ ਸੱਚ ਇਹੋ ਇੱਕ ਆਦ ਸੱਚ ਆਦ ਹਿਰਦੇ ਦੇੰਦੇ ਕਰਾ ਸੁਵਾ ਦੇ ਸੱਚ ਨਹੀਂ ਆਰੀ ਨਿਕਾਮ ਆਦ ਕੀ ਕਰਨਾ ਨੂੰ ਕਰ ਉਹਨਾਂ ਧਰਮਾਂ ਦੇ ਨਿਕਾਮ ਕਰਨ ਆਦਾਂ ਨੂੰ ਕਰਕੇ ਤੇ ਫਿਰ ਉਬਾਸ਼ਨਾ ਕਰੋ ਉਬਾਸ਼ਨਾ ਕਰਕੇ ਸੱਚ ਖੜਦਨ ਕਰੋ ਪਰਮੇਸ਼ਰ ਦੇ ਨਾਮ ਦਾ ਅੱਗੇ ਫਿਰ ਜੋ ਆਦ ਸੱਚ ਜੋ ਕੋ ਜੇ ਚਾਰ ਨੇ ਬਿਰਾਗ ਇਹ ਕਰਤੰਤੀ ਮੋਖ ਤੀ ਸੱਜੇ ਇਹ ਕਾਲ ਦੇ ਵਿੱਚ ਵੀ ਉਹ ਫੁਰਸਤੋ ਕਰੋ ਮੰਨਣ ਕਰੋ ਸਮੇਂ ਸਮੇਂ ਨਿਸ਼ਟਾਨ ਕਰੋ ਨਾਨਕ ਹੋਸੀ ਤੀ ਸੱਜੇ ਇਹ ਗੁਰਸਿੱਖੀ ਵੀ ਉਹ ਸੰਸਰੂਗ ਤੋਂ ਉਹਨੂੰ ਹੋ ਜਾਏਗਾ ਜਦੋਂ ਮਾਰਾ ਪਰਮੇਸ਼ਰ ਦਾ ਗੂੜ੍ਹ ਸਿਖਿਆਤ ਹੋ ਗਿਆ ਜੇ ਮੇਰਾ ਸਰੀਰ ਜਦੋਂ ਅੰਤ ਹੋ ਗਿਆ ਉਸ ਵੇਲੇ ਮਾਰਾ ਸਾਲ ਮੇਲੇ ਸਾਥ ਦੇਵੇਗਾ ਕਿ ਨਹੀਂ ਤਾਂ ਮਾਰਾ ਕਦੇ ਮਾਨਕ ਹੋਸੀ ਕਿ ਸੰਦੇ ਸਿੱਖ ਉਹ ਤੈਨੂੰ ਇਹ ਹੈਗਾ ਸੂਪਰਾਪਤ ਹੋਵੇਗਾ ਇਹ ਸਰੀਰ ਦੇ ਨਾਸ ਹੋਣ ਤੋਂ ਵੀ ਸੱਚ ਜੀਵ ਹੋਵੇਗਾ ਕਦੇ ਸਰੀਰ ਦੇ ਮਰਨ ਨਾਲ ਮਰੇਗਾ ਨਹੀਂ ਈ ਦੇ ਜਮਨ ਨਾਲ ਜਮਦਾ ਨਹੀਂ ਉਹ ਐਸਾ ਸੂਪਾ ਤੈਨੂੰ ਪ੍ਰਾਪਤ ਹੋਵੇਗਾ ਕਦੇ ਨਾਸ ਨਹੀਂ ਹੋਵੇਗਾ ਨਾਮ ਸ਼ਬਦ ਹੈ ਅਰਥ ਕੋਈ ਜਿਹੜੇ ਪ੍ਰਮਾਤਮਾ ਨੂੰ ਜੋਈ ਨਾਨਕ ਨੇ ਨਾਮ ਕਹਾਵੇ ਸੋਈ ਜਿਨ੍ਹਾਂ ਨੂੰ ਅਨੇਕਤਾ ਤੋਂ ਰਹਿਤ ਅਬਿਆਸ ਤੋਂ ਰਹਿਤ ਕਹਨੇ ਉਹ ਪ੍ਰਮੇਸ਼ਰ ਆਪ ਦਾ ਨਾਮ ਨਾਨਕ ਨਾਮ ਜੋ ਜੀਵੇ ਵਿੱਚ ਅਨੇਕਤਾ ਹੀ ਨਹੀਂ ਜਿਵੇਂ ਐਨਕ ਤੇ ਦੋ ਕਹਾਂਗੇ ਦੁਆਇਤ ਨਹੀਂ ਜਿਵੇਂ ਐਸਾ ਕੋਈ ਪ੍ਰਮੇਸ਼ਰ ਅਨੇਕ ਨਾਮ ਤੋਂ ਅੱਲਾਹਮ ਦੇ ਇਹ ਜਿਹ ਦੁਨੀ ਹੀ ਸੰਕਾਰ ਜੀਦਾ ਦੁਨੀ ਵਜਾਈ ਬੈਗੀ ਤੂੰ ਵੀ ਵਜਨ ਵਾਲ ਸੋਈ ਜੀਉ ਨਾ ਵੈਦਾ ਜੀ ਸੰਭੋ ਕਰਦਾ ਸਾਰ ਜਿਹੜਾ ਇਹ ਦੇਖਦੇ ਹੋ ਰਹੇ ਜੀ ਪੂਰਨ ਕਮੇਸ਼ ਦਾ ਸਾਕੇ ਮੰਦਿਰ ਹੁਸਾ ਹੈ ਆਪ ਦੇ ਭੜਕਾਂ ਦੀ ਰੱਖਿਆ ਕਰਨੋਂ ਆਪ ਦੇ ਅਵਤਾਰ ਆ ਰਹਿਆ ਵੀ ਸੱਚ ਨੂੰ ਹੋਵੇਗਾ ਤੇ ਇਹ ਨਾ ਹੋਵੇਗਾ ਇਹ ਸਭ ਸੰਗਤ ਜੀ ਮੰਤਰ ਦੇ ਅਰਥ ਅੱਜ ਇੱਕ ਵਕਤ ਹੋ ਚੁੱਕਿਆ ਹੈ ਕੋਲਾ ਇਸ ਅਗਲੀ ਫਰਵੀ ਜਿਹੜੀ ਸਰਜਾ ਹੋਣੀ ਹੈ ਇਹ ਕੱਲ ਨੂੰ ਅਗਰਬ ਹੋਵੇਗੀ ਉਹਨੇ ਤੁਸੀਂ ਸੰਕਾ ਨੇ ਸਾਰੇ ਅੰਕੂ ਦਾ ਆਖੀ ਖੁੱਦ ਕੀ ਸਭ ਤੋਂ ਸਭੀ ਹੈ ਜਿੰਨੀ ਕੋ ਮਹਾਪੰਖਾਂ ਦਾ ਖੁਲਾਈ ਉਹਨਾਂ ਵਿੱਚ ਜੋ ਵੀ ਜਿੰਨੇ ਗਹਿਣ ਹੋਏ ਆ ਉਹ ਵੀ ਐਸ ਤਰ੍ਹਾਂ ਦੇ ਜਿੰਨੇ ਜਿੱਤੇ ਆਏ ਆ ਵਿਦਿਆਰਥੀਆਂ ਨੇ ਇਹ ਕਹਾਣੀ ਸੁਣੀ ਸਾਰਿਆਂ ਦੇ ਤਕਰੀਬਨ ਕਾਫੀ ਜਿੰਦੇ ਹੋਣਗੇ ਤੇ ਉਹ ਰਹੇ ਜੀ ਆਪ ਨੂੰ ਖਿਮਾ ਕਰਨੀ ਕੋਈ ਇਸ ਕਹਾਣੀ ਸਰਜੂ ਨੇ ਦੇ ਮੂਲ ਮਕਸਦ ਜੇ ਪਾਉ ਤੋ ਉੱਤਰੀ ਵਿਚਾਰ ਦੋ ਸਿਰੇ ਇੱਕ ਉਹ ਅੰਤ ਕਰਨਾ ਨੂੰ ਵਰਤਾ ਕੋ ਆਪ ਹੀ ਸਤਿਗੁਰੂ ਨਾਮੁ ਕੋ ਹਉਤੀ ਜੀ ਮੱਛ ਵਹੀ ਗੋਦ